श्लोक महल्ला चौथा मैं मन प्रेम परम का अठे पहल लगन जन नानक कृपा धार प्रभु सतगुरु सुख बसन के मैं मन तन प्रेम गुण। प्रेम का अठे पहल लगन ਅੱਛਾ ਪਰ ਉਹ ਪਿਆਰ ਦਾ ਖਸਬੂ ਤਾਂ ਤੇ ਭਰਤਾਂ ਦਾ ਪ੍ਰੇਮ ਪਿਆਲਾ ਪੂਰੂ ਲੱਗਿਆ ਰਹੇ ਮੇਰੇ ਤਨ ਦੇ ਲੰਡੀ ਹੈ ਅੱਕੇ ਬਾਰੇ ਰਸ ਬੁੰਦਾ ਰਹੇ ਜੋ ਤਨ ਦੇ ਹੈ ਤੇਰੀ ਇੱਛਾ ਮੇਰੀ ਭੁੱਖੇ ਯਾਰਾ ਨਾਨਕ ਕਿਰਪਾ ਧਾਰ ਪ੍ਰਭ ਸਾਤ ਗੁਰ ਸੁਖੀ ਸੁਖੀ ਬਸੰ। ਪ੍ਰਵੇਸ਼ ਤਾ ਐਸੀ ਤੱਪਾ ਘਰ ਧਾਰ ਬਿਰਤੇ। ਤੇ ਮੇਰੇ ਜਿਹੜਾ ਦੇ ਅੱਗੇ ਪੈਰ ਕੇ ਪਹਿਲਾ ਉਹਦੇ ਦੌਣ ਲੱਗਿਆ ਰਹੇ ਜਾਵਨ ਵਿਚਾਰ ਤੇ ਬੁੱਧ ਅੱਠ ਪੈਰ ਜੁੜੀ ਰਹੇ ਮਰਬੁੱਤੀ ਤਾਂ ਇਹ ਤੇ ਅੱਲਾ ਦੇ ਗੁਰੂ ਰਖੇ ਰੂਕ ਤਾਂ ਗੁਰਤੀ ਸੇਵਾ ਹੋਊ ਸੇਵਾ ਸਤਗੁਰ ਕੀ ਹਮਮ ਸੇਵਾ ਕਰਦੇ ਤਰੀਕੇ ਨਾਲ ਏ ਵੀਰੋਸਾ ਬੁਨਤਾ ਦੇ ਵੀਰੋ ਤੇਰ ਪਾਗੜਾ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪਰਮ ਕੀ ਜਿਉ ਬੋਲਨ ਤੇ ਮੈਂ ਸੁਹੰਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਰੰਨ ਜਿਨ ਅੰਦਰ ਪ੍ਰੀਤ ਪਰਮ ਕੀ ਇਹਦੇ ਅੰਦਰ ਦੀ ਪ੍ਰੀਤ ਹੈ ਉਨਾ ਤੇਰਾ ਸੋਹਣੇ ਜਿਵੇਂ ਬੋਲਦੇ ਨੇ ਉਹੀ ਸੋਹਣੇ ਲੱਗਦੇ ਜਿਹੜੀ ਬੋਲੀ ਬੋਲਦੇ ਨੇ ਸੋਹਣੀਆ ਬੋਲੀ ਬੋਲਦੇ ਨੇ ਕਰੋੜ ਕੋਣੀ ਬੋਲੀ ਬੋਲਦੇ ਦੀਓ ਕੜੀ ਬੋਲੀ ਬੋਲਦੇ ਦੀ ਪ੍ਰੇਮ ਦੀ ਬੋਲੀ ਬੋਲਦੇ ਹੋ ਠੀਕ ਜਦ ਵੀ ਬੋਲਦੇ ਨੇ ਪ੍ਰੇਮ ਦੇ ਰੰਗ ਝਰੰਕੇ ਹੋ ਬੋਲਦੇ ਕਾਨ ਤੋਂ ਹਾਏ ਆਪੇ ਜਾਨ ਜਿਨਾਂ ਲਈ ਪ੍ਰੀਤ ਮਰਦ ਜਾਣਦੇ ਆਪੇ ਜਾਣਦਾ ਉਹ ਜਿਨਾਂ ਲਈ ਪੋਨਰੂ ਹੈ ਇਸ ਪ੍ਰੀਤ ਰਾਤੀ ਇਹ ਪ੍ਰੀਤ ਰਾਤੀ ਵੀ ਕੋਈ ਜਾਣਦਾ ਉਹਨਾਂ ਦੀ ਪ੍ਰੀਤ ਨੂੰ ਉਹ ਨਹੀਂ ਜਾਣ ਸਕਦੀ ਦੁਨੀਆ ਦੀ ਬਚੁਰ ਸਕਦੀ ਜਾਦੀ ਗੋਰੀ। paudi tu karta aap apul hai ullan vich nahi tu kare so sacche bhala hai gur shabad bujhai tu karta aap apul hai ਹੂੰ ਹੂੰ ਕੋਈ ਕਿਹ ਕੁਝ ਗਲਤ ਹੋ ਸਕਦਾ ਹੁੰਦਾ ਤੋ ਜਦੋਂ ਕੋਈ ਵੰਡ ਤੇ ਗਲਤੀ ਨਹੀਂ ਹੋ ਰਹੀ ਗਲਤੀ ਨਹੀਂ ਹੋ ਰਹੀ ਦੋਸਤ ਨਹੀਂ ਹੋ ਰਹਾ ਠੀਕ ਹੈ ਜੀ ਕੁਝ ਹੋ ਰਹੀ ਹੈ ਕੋਈ ਇਸ਼ਾਰਾ ਤੁਮ ਇਹ ਜਿਹੇ ਕਰਦੇ ਵਿੱਚ ਜਗੋ ਰੇ ਭਰਾ ਤੇ ਤੇ ਵੇਦੂ ਕਮ ਸਾਇਬਾ ਅਗੰਮ ਬਯਾਨ ਹੈ ਸਭ ਤਿਆਲ ਹੈ ਸਭ ਤੂ ਤਿਆਈ ਸਭ ਤੂ ਤਿਆਈ ਕਮ ਸਾਇਬਾ ਅਗੰਮ ਤਿਆਲ ਕਰਕੇ ਸਾਰੇ ਤੇ ਰੰਗ ਚੁੜੇ ਤੁਹਾਨੂੰ ਜੀ ਤੇਰੇ ਤੋਂ ਸਭ ਛਡਾ ਤੂੰ ਸਭ ਛਡਾਈ ਕੋਈ ਕਾਹ ਤੇ ਛਡਾਈ ਸਾਰੇ ਜੀ ਸਕਦੇ ਪਰ ਸਾਡੀ ਗਲਤੀ ਅਸੀਂ ਸੱਟਾਂ ਚਾਹੁੰਦੇ ਸੀ ਮਾਇਆ ਨੂੰ ਛੱਡਣਾ ਚਾਹੁੰਦੇ ਅਸੀਂ ਤੂ ਤਾਂ ਸਾਡੇ ਨੂੰ ਛਡਾਉਂਦੇ ਸਮਰੱਥ ਤੂ ਸਭ ਛਡਾਈ ਹਰਦੀ ਵਾਹ ਚੜ੍ਹਦੀ ਜੁਲਾਈ ਜੁੜੇਦੀ